श्लोक मोहल्ला तीजा नानक सो सालाही है जिस बस सब किस होए तिसै शरीवो प्राणीओ तिस बिन अवर न कोई गुरुnabla ji keh rahe ne nanak so saalaahi hai jis bas sab toe ji de bas vich sab kuch tisai sare vo ਦੁਨੀਆਂ ਦੇ ਲੋਕੋ ਉਹਦੀ ਸੇਵਾ ਕਰੋ ਜਿਹਦੇ ਬਿਨਾਂ ਜਿਹੜਾ ਸਭ ਵਿੱਚ ਹੈ ਕਿਸੇ ਬਿਨਾਂ ਹਵਲ ਨਾ ਕੋਈ ਜਿਹਦੇ ਬਿਨਾਂ ਕੁਛ ਹੈ ਨਹੀਂ ਘਟ ਕੱਟ ਮੈਂ ਹਰ ਜੋ ਹਰ ਦੀ ਸੇਵਾ ਕਰੋ ਪੁੱਤਰ ਆਤਮਾ ਦੀ ਸੇਵਾ ਕਰੋ ਉਹਦੇ ਕਹਿੰਦੇ ਚੱਲੋ ਇਸ ਵਿੱਚ ਨਾ ਕੋਈ ਲੋ ਗੁਰਮੁਖੀ ਹਰ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ ਗੁਰਮੁਖ ਹੈ ਪ੍ਰਭ ਮਨ ਵਸੈ ਗੁਰਮਖ ਨੇ ਹਰ ਪ੍ਰਭ ਦੇ ਵਿੱਚ ਵਸ ਜਾਂਦਾ ਬਸ ਤਾਂ ਹੈ ਤਾਂ ਸਦਾ ਸਦਾ ਸੁੱਖ ਹੈ ਤਾਂ ਸਦਾ ਸਦਾ ਸੁਖ ਮਿਲ ਉਹ ਵੀ ਥੋੜੀ ਸਦਾ ਸਦਾ ਸੁੱਖ ਹੋ ਜਾਂਦੇ ਉਹਨਾਂ ਦੇ ਮਨ ਵਿੱਚ ਵਸਦਾ ਰਹਿੰਦਾ ਹਰ ਵਕਤ ਉਹਨਾਂ ਵਿੱਚ ਬਸਾਇਆ ਹੋਇਆ ਹੁੰਦਾ ਉਹਨਾਂ ਤਾਂ ਸਦਾ ਸਦਾ ਸੁੱਖ ਹੁੰਦਾ ਹੈ ਸਹਿਸਾ ਮੂਲ ਨਾ ਹੋਈ ਸਭ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਕਹਿਣਾ ਕਿਛੂ ਜਾਏ ਉਹਨਾਂ ਨੂੰ ਕਦੇ ਵੀ ਚਿੰਤਾ ਨਹੀਂ ਹੁੰਦੀ ਐਸਾ ਚਿੰਤਾ ਨੂੰ ਨਾ ਕਰਦੇ। ਕਾਹ ਨਹੀਂ ਹੁੰਦਾ ਸਹਿਮ ਉਹ ਡਰ ਉਹਨਾਂ ਨੂੰ। ਚਿੰਤਾ ਵਿੱਚੋਂ ਜਾਇਏ ਚਿੰਤਾ ਉਹਦੇ ਵਿੱਚੋਂ ਖਤਮ ਹੋ ਜਾਂਦੀ ਹੈ। ਜੋ ਕੁਝ ਹੋਏ ਸੋ ਸਜੇ ਹੋਏ ਉਹਨਾਂ ਵਾਸਤੇ ਤਾਂ ਜੋ ਕੁਝ ਹੋ ਰਿਹਾ ਹੈ ਕੇ ਹੋ ਰਿਹਾ ਹੁਕਮ ਨਾਲ ਹੋ ਰਿਹਾ ਹੈ ਕੇ ਹੋ ਰਿਹਾ ਕਹਿਣਾ ਦਿੱਕੂ ਤੋ ਜਾਏ ਇਸ ਕਰਕੇ ਉਹ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਜੋ ਕੁਝ ਹੋ ਰਿਹਾ। ਉਹਨੇ ਕਹਿੰਦੇ ਚੰਗਾ ਹੋਇਆ ਮਾੜਾ ਹੋਇਆ ਉਹਨੇ ਜੋ ਕੁਝ ਹੋਇਆ ਠੀਕ ਹੈ ਹੋਇਆ। ਮੋਕੰਦਾ ਲੋ ਵੇ ਆ ਕੀ ਕੀ ਠੀਕ ਸੱਤੇ ਸੱਤਾ ਜੋ ਉਹ ਰੇ ਅਪਣੇ ਵਾਸਤੇ ਉਹ ਇਹਦਾ ਤਾਂ ਟਿੱਪਣੀ ਵੀ ਕਰਦੇ ਕੋਈ ਸੱਚਾ ਸਾਹਿਬ ਮਨ ਵਸੈ ਮਨ ਚਿੰਦਿਆ ਫਲ ਪਾਏ ਨਾਨਕ ਤਿੰਨ ਆਖਿਆ ਆਪ ਸੁਣੇ ਜੇ ਲਇਨ ਪੰਨੈ ਪਾਏ ਸੱਚਾ ਸਾਹਿਬ ਜਦੋਂ ਮਨ ਦੇ ਵਿੱਚ ਵੱਸਦਾ ਹੈ ਤਾਂ ਮਨ ਚਿੰਦਿਆ ਫਲ ਪਾਏ ਫਿਰ ਦੁਨ ਫਲ ਦੀ ਪ੍ਰਾਪਤੀ ਹੁੰਦੀ ਹੈ ਨਾਨਕ ਤਨ ਦਾ ਆਖਿਆ ਆਪ ਸੁਣੇ ਨਾਨਕ ਕਹਿੰਦਾ ਤਨ ਦਾ ਆਖਿਆ ਆਪ ਸੁਣਦੇ ਹੋ ਜੇ ਲਈਨ ਬੰਦੇ ਪਾਏ ਜਿਨ੍ਹਾਂ ਨੂੰ ਆਪਣੇ ਲਾੜ ਲਾ ਲਿਆ ਬੰਦੇ ਪਾ ਲਿਆ ਜੇ ਸਤ ਸੰਤੋਖੀ ਹੋ ਗਏ ਜਿਹੜੇ ਜਿਹੜੇ ਸਤ ਸੰਤੋਖ ਅਰਦਾਸ ਤਾਂ ਸੋਢੇ ਬਹਾਲੇ ਪਾਸ ਨਾਲੇ ਪਾਸ ਬਾਲਦਾ ਨਾਲੇ ਉਹਨਾਂ ਦੀ ਅਰਦਾਸ ਹੁੰਦਾ ਜਿਹੜੇ ਸਤ ਸੰਤੋਖੀ ਨੇ ਉਹਦੇ ਪਰਦੇ ਪੈ ਜਾਂਦੇ ਨੇ ਉਹਦੇ ਪੱਲੇ ਪੈ ਜਾਂਦੇ ਨੇ ਤੇ ਜਿ ਡੈਗਾ ਤਖਾਲਾਂ ਗਏ ਕਿ ਭੁਖ ਦਾਇ ਤੈਤੀ ਹੀ ਰਾਜਾਂ ਸੁਖ ਵਿੱਚ ਸੁਖ ਬਣਾਈ ਉਹਦੇ ਪੰਨੇ ਪੈ ਗਏ ਪੰਨੇ ਤੇ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਗੁਰਮੁਖੀ ਜਿਨੀ ਬੂਝਿਆ ਹਰ ਅੰਮ੍ਰਿਤ ਰੱਖਿਆ ਉਰਤਾਰ ਤੁਮਰਤਾ ਸਦਾ ਹੀ ਵਰਸਦਾ ਬੁਝਿਆ ਜੀਨੇ ਬੁਝਰ ਹਾਰਨ ਬੁਝ ਅਮਰ ਸਦਾਈ ਬਸਦਾ ਹੁਕਮੇ ਮਰਦਾ ਹੁਕਮ ਲਗਾਤਾਰ ਚੱਲਦਾ ਹੁਕਮ ਕਰੇ ਆਈ ਨਹੀਂ ਆਈ ਬਈ ਹੁਕਮ ਬੰਦ ਹੋ ਜਾਂਦਾ ਤੇ ਦਰ ਘੇ ਵੀ ਚੱਲੂ ਪੈਦਾ ਹੁਕਮ ਨੇ ਜਿਹਨਾਂ ਆਪਣੇ ਅੰਦਰ ਹਰ ਬੁਝ ਲਿਆ ਉਬਰ ਤਰਖਿਆ ਹਰ ਤਾਰ ਨੇ ਉਦਦ ਧਾਰਨ ਕਰਕੇ ਰੱਖਿਆ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ ਹਮੇ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਦਾ ਨਾਮ ਹੈ ਵਰਸੈ ਕਿਰਪਾ ਧਾਰ ਹਰਬਦੰਦ ਰਾਖੀ ਨੂੰ ਦੱਸਿਆ ਅਸਲ ਦੇ ਵਿੱਚ ਹਰ ਦੇ ਨਾਲ ਉਹ ਤਾਂ ਲੱਗਿਆ ਆਪਣਾ ਛੱਤੀ ਨੇ ਸਾਡੇ ਕੋਲ ਪੀਣ ਵਾਲੇ ਇਹ ਹਰ ਦੇ ਨਾਲ ਅੰਮ੍ਰਿਤ ਜਾਣ ਕੇ ਲਾਇਆ ਹੋਇਆ ਉਹ ਜਿਹੜਾ ਦੁਨੀਆਂ ਦਾ ਅੰਮ੍ਰਿਤ ਹੈ ਮੰਨਦੇ ਪੀਣ ਵਾਲਾ ਅੰਮ੍ਰਿਤ ਹੈ ਪਰ ਅਬਰਤ ਬੂਧ ਸੁਆਣੀ ਕਿ ਮੈਂ ਪੀਵਣ ਹਾਂ ਹਰ ਅਮਰਤ ਪੀਵੇ ਸਦਾ ਆਰੰਭ ਜਿਹੜੇ ਅਮਰਤ ਹਰ ਅਮਰਤ ਪੀਂਦੇ ਨੇ ਸਦਾ ਹੀ ਆਨੰਦ ਕਰਨ ਦੇ ਨੇ ਸਰ ਉਹਨਾਂ ਦਾ ਰੰਗ ਭਾਗ ਹੁੰਦਾ ਈ ਦੀ ਦੁਆਰਾ ਹੋਮੇ ਤ੍ਰਿਸ਼ਨੋ ਮਾਰ ਆਰੰਭ ਦੇ ਸੰਜੇ ਨੇ ਨਾਮ ਦੇ ਨਾਲ ਹੋਮੇ ਔਰ ਤ੍ਰਿਸ਼ਨੋ ਮਾਰ ਕੇ ਮਰੀ ਰਹਿੰਦੀਆਂ ਉਹਨਾਂ ਦੀ ਹੋਮੇ ਤ੍ਰਿਸ਼ਾ ਤੇ ਇਹ ਹਾਵੀ ਰਹਿੰਦਾ ਨਾਮ ਦਾ ਆਰੰਭ ਅਬਰਤ ਹਰ ਨਾਮ ਹੈ ਅਬਰਤ ਕੀ ਹੈ ਅਬਰਤ ਹਰ ਨਾਮ ਹੈ ਹਰ ਕਾਮ ਹੀ ਅਬਰਤਾ ਹੈ ਅਬਰਤ ਹਰ ਕਾ ਨਾਮ ਹੈ ਸਿੱਧੀ ਦੇ ਫਿਡਿਊਸ਼ਨ ਦੇਤੀ ਅਮਰਤੀ ਅਬਰਤ ਹਰ ਕਾ ਨਾਮ ਹੈ ਵਰਸੇ ਕਰ ਪਾਤਾ ਉਹਦੀ ਕਿਰਪਾ ਹੁੰਦੀ ਹੈ ਤਾਂ ਤਾਰ ਵਰਸਦੀ ਹੈ ਕਿਸੇ ਦੇ ਬੂਝ ਬਨਨ ਵਰਸਦੀ ਇਹ ਹਰ ਦੀ ਕਿਰਪਾ ਨਾਲ ਵਰਸਦੀ ਹੈ ਜੀ ਪਰਮੇਸ਼ਰ ਦੀ ਕਿਰਪਾ ਨਾਲ ਵਰਸਦੀ ਹਰ ਨੂੰ ਤਾਂ ਅਬਰਤ ਮਿਲਦਾ ਇਹ ਹਰ ਦੇ ਪੀਣ ਵਾਲਾ ਅਬਰਤਾ ਤੇ ਇਹ ਜਿਹੜਾ ਅਮਰਤ ਹੈ ਇਹ ਮਨ ਪੀਣਾ ਹੈ ਜੀ ਹਰ ਤੋਂ ਲੈ ਕੇ ਕੱਠਾ ਹੀ ਹੋ ਗਏ ਫਿਰ ਤਾਂ ਬੋਲਦੇ ਕਿ ਬਿਨਾਂ ਉਹਨੇ ਇਕੱਠਾਈ ਪੀ ਲਿਆ। ਅੱਛਾ ਜੀ। ਜੇ ਕੋਏ ਤੇ ਮਿਲਦਾ ਮਿਲਣਾ ਹੀ ਨਹੀਂ ਜਾਂ ਇੱਕ ਹੋ ਗਏ ਫਿਰ ਇਕੱਠਾ ਹੀ ਪੀ ਲਿਆ। ਪੀ ਕੇ ਉਗਣਾ ਨਾ। ਅੱਛਾ ਜੀ ਫਿਰ ਆਮ੍ਰਿਤ ਕਹ ਹੈ ਨਾਨਕ ਗੁਰਮੁਖੀ ਨਦਰੀ ਆਇਆ। ਹਰ ਆਤਮ RAM ਰਾਰ। ਨਾਨਕ ਗੁਰਮੁਖੀ ਨਜ਼ਰੀ ਆਇਆ ਉਹਦੇ ਕਹਿੰਦਾ ਗੁਰਮਖਾਂ ਨੂੰ ਨਜ਼ਰੀ ਆ ਗਿਆ ਗੁਰਮੁਖ ਨੇ ਦੇਖ ਲਿਆ ਗੁਰਮਖਾਂ ਨੂੰ ਦਰਸ਼ਨ ਦੇ ਦਿੱਤਾ ਪਰ ਆਦਮ ਰਾਮ ਮੁਰਾਰ ਕਹਣਾ ਆਦਮ ਰਾਮ ਨੂੰ ਦਰਸ਼ਨ ਦਿੱਤੇ ਲੋਕ ਸੁ ਕਿਹੜੇ ਪਰਮੇਸ਼ਰ ਦੇ ਤੇ ਦਰਸ਼ਨ ਆਦਮ ਨਾਲ ਆਤਮ ਦਰਸ਼ਨ ਹੋਇਆ ਆਪਣੇ ਆਪ ਦਾ ਹੀ ਦਰਸ਼ਨ ਹੋਇਆ ਇਹ ਪਤਾ ਲਈ ਕਾਗ ਦੇ ਵਿੱਚੋਂ ਨੌਬ ਨੂੰ ਕਾਹ ਚੋਂ ਦਰਸ਼ਨ ਕਰਾਈ ਜਾਂਦੇ ਨੇ ਸਹੀ ਜੀ ਪੌੜੀ ਅਤੁੱਲ ਵਿਣ ਤੋਲੇ ਪਾਇਆ ਨਾ ਜਾਏ ਗੁਰ ਸ਼ਬਦ ਵਿਚਾਰੀਐ ਗੁਣ ਮੈਂ ਰਹੈ ਸਮਾਈ ਅਤੁੱਲ ਆ ਗਏ ਨੇ ਅਤੁੱਲ ਤਾਂ ਕਹਿਦੇ ਕਿਉਂ ਤੋਲੀਏ ਤੋਲੀਏ ਕਦੋਂ ਅਤੁੱਲ ਜੇ ਤੋਲੀਏ ਨਾ ਵਿਣ ਤੋਲੇ ਪਾਇਆ ਦੋ ਜਾਏ ਤੋਲੇ ਤੇ ਬਿਲੂ ਪ੍ਰਾਪਤੀ ਦੀ ਹੈ ਤੋਲਣਾ ਵੀ ਪੈਣਾ ਹੈ ਵੀ ਉਤਲ ਤੇ ਚ ਗਈ ਗੱਲ ਹੁਣ ਗੁਰ ਸ਼ਬਦ ਵਿਚ ਹੈ ਆ ਦੇਖੋ ਆਈ ਤੋਲਣੇ ਨਿਰਗੁਰੇ ਦਾ ਸ਼ਬਦ ਹੈ ਉਪਦੇਸ਼ ਹੈ ਜੋ ਵਿਚਾਰ ਲਈ ਤੋਲਣ ਗੁਣ ਮਹਿ ਰਹੇ ਸੁਭਾਏ ਉਹਦੇ ਗੁਣ ਦੇ ਵਿੱਚ ਆਪ ਇਸ ਬੋਝ ਵਿੱਚ ਜਿਸ ਸੁਭਾਏ ਗੁਣ धारण ਕਰ ਲੋ ਆਪਣੇ ਆਪ ਨੂੰ ਉਹ ਜਾਈ ਕਰ ਲੋ ਹਾਂਜੀ ਆਪਣਾ ਆਪ ਆਪ ਤੋਲਸੀ ਆਪੇ ਮਿਲੇ ਮਿਲਾਏ ਕਿਸ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਈ ਅਕਲ ਦੇ ਵਿੱਚ ਤਾਂ ਆਪਣਾ ਆਪ ਤੋਲਣਾ ਸੀ ਆਪਣਾ ਆਪ ਆਪੇ ਤੋਲਣਾ ਸੀ ਮੇਰੇ ਚ ਕਿੰਦੀ ਖੋਟ ਹੈ ਤੇਰਾ ਸੱਚ ਹੈ ਜਾਂ ਲੋ ਝੂਠ ਹੈ ਕਿੰਦੀ ਖੋਟ ਰਹਿ ਗਈ ਮੇਰੇ ਚ ਤਾਂ ਆਪਣਾ ਜਨਾ ਹੋ ਗਿਆ ਖੋਟ ਕਿੰਦੀ ਹੈ ਆਪਣਲੇ ਗਰਬਾਨ ਦੇ ਸੇਲੀ ਵਗਰ ਦੇਖ ਮਤਲਬ ਲਗਿਆ ਆਪਣਾ ਆਪ ਤੋਲੀ ਜਾਓ ਤੋਲ ਸੀ ਆਪੇ ਬਿਲੇ ਬਿਲਾਏ ਤਾਂ ਮਿਲੂਗਾ ਤਾਂ ਮਨ ਮਿਲੂਗਾ ਿਸਕੀ ਕੀਮਤ ਨਾ ਪਵੈ ਕਹਿਣਾ ਕਛੂ ਨਾ ਜਾਏ ਜੇ ਬੇਲ ਬਿਲਜਵੇ ਜੇ ਬੇਲ ਹੋਜਵੇ ਸੋਚੋ ਹੋਠ ਨਿਕੜ ਜਵੇ ਕੋ ਹੋਜਵੇ ਫਿਰ ਉਹਦੀ ਕੋਈ ਕੀਮਤ ਨਹੀਂ ਪੈ ਸਕਦੀ। ਉਹਦੇ ਬਾਰੇ ਕੁਝ ਕਿਹਾ ਜਾ ਸਕਦਾ ਕਹਿਣਾ ਕਛੂ ਨਾ ਜਾਏ। ਪਰ ਸੋ ਤਾਂ ਕਹਿਆ ਨਹੀਂ ਜਾ ਸਕਦਾ ਬੋਲਤੀ ਵੀ ਬੰਦ ਹੋ ਜਾਂਦੀ ਹੈ। ਕੀਮਤ ਵੀ ਨਹੀਂ ਪੈ ਸਕਦੀ। ਕੀਮਤ ਤਾਂ ਪਊ ਜੇ ਬੋਲਤੀ ਖੁੱਲੀ ਹੋਵੇ। ਬੋਲਤੀ ਉਹ ਬੰਦ ਹੋ ਜਾਊਗੀ ਐਸਾ ਵਸਤਾਜ ਪਹੁੰਚ ਜੇ। ਉਦੇ ਬਾਰੇ ਕੋਈ ਕੁਝ ਨਹੀਂ ਬੋਲ ਸਕਦਾ ਹਾਂਜੀ ਠੀਕ ਹੈ ਜੀ ਇੱਥੇ ਆਪਣਾ ਆਪ ਆਪ ਤੋਲਸੀ ਪਹਿਲਾ ਜਿਹੜਾ ਆਪ ਹੈ ਇਹ ਔਂਕੜ ਵਾਲਾ ਦੂਸਰਾ ਆਪ ਜਿਹੜਾ ਸਿਹਾਰੀ ਵਾਲਾ ਆਪੇ ਹੀ ਅੱਛਾ ਆਪਣੇ ਆਪ ਆਪਣੇ ਆਪ ਆਪੇ ਹੀ ਤੋਲਣ ਅੱਛਾ ਤੇ ਵਿਚਾਰ ਨਾਲ ਤੋਲਿਆ ਜਾਏਗਾ ਹਾਂਜੀ ਹਾਂਜੀ ਆਪਣੇ ਆਪ ਨੂੰ ਆਪੇ ਮਿਲਣਾ ਜੀ ਆਪੇ ਮਿਲੇ ਮਿਲਾਏ ਹਾਂ ਬਲਿਹਾਰੀ गुर ਆਪਣੇ ਜਿਨੀ ਸੱਚੀ ਬੂਝ ਦਿੱਤੀ 부ਝਾਏ जगत ਮੁਸੈ ਅੰਮ੍ਰਿਤ ਲੁੱਟੀਐ ਮਨਮੁਖ ਬੂਝ ਨਾ ਪਾਏ ਆਹ ਜਿਹੜੀ ਪੰਕਤੀ ਹੈ दुनिया ਦੁਨੀਆ ਦੀ ਮੱਤ ਵਿੱਚ ਨਹੀਂ ਹੈ ਜੇ ਐਸਾ ਦਿਖਾ ਦੇਣ ਉਹ ਬਲਿਹਾਰੀ ਗੁਰ ਆਪਣੇ ਜਿਨੇ ਸੱਚੀ ਬੂਝ ਦਿੱਤੀ 부ਝਾਏ ਆਹ ਆਪਣੇ ਆਪ ਨੂੰ ਆਪੇ ਤੋਲਣਾ ਹੈ ਆਪਣੇ ਆਪ ਨਾਲ ਆਪੇ ਦਰਸ਼ਨ ਕਰਨਾ ਹੈ ਆਪਣੇ ਆਪ ਨਾਲ ਆਪੇ ਮਿਲਣਾ ਕਿਸੇ ਮੱਤ ਵਿੱਚ ਨਹੀਂ ਇਹ ਗੱਲ ਹੈ ਬਾਹਰੋਂ ਦਰਸ਼ਨ ਦੇ ਸਭ ਦੇ ਉਹ ਬਲੇ ਹਾਰੀ ਗੁਰ ਆਪਣੇ ਮੈਂ ਆਪਣੇ ਗੁਰ ਤੋਂ ਪਰਵਾਹ ਨਾ ਜਿਹਨੇ ਸੱਚੀ ਬੂਝ ਦਿੱਤੀ 부ਝਾਏ ਜਾਗਤ ਮਸਾ ਸਾਰਾ ਸੁਖਾਤ ਠੱਗਿਆ ਵਿੱਚ ਸਾਰੇ ਸੰਤ ਠੱਗੇ ਹੋਏ ਨੇ ਉਹੀ ਠੱਗੀ ਦਾ ਪ੍ਰਚਾਰ ਕਰ ਰਹੇ ਨੇ ਉਮਰ ਲੁੱਟੀ ਹੈ ਹੁਣ ਪੂਜਣਾ ਨਾ ਪਾਏ ਉਮਰ ਤਾਂ ਲੁੱਟ ਰਿਆ ਹਰ ਵਕਤ ਸਬਰ ਤਾਂ ਹਰ ਵਕਤ ਬਰਸ ਰਿਹਾ ਸੰਸਾਰ ਨੂੰ ਪਤਾ ਹੀ ਕੋਈ ਨਹੀਂ ਉਹ ਹੋਰ ਇਹ ਪਤਾਸਿਆਂ ਦਾ ਬਾੜੀ ਤਿਆਰ ਕਰੀ ਜਾਂਦੇ ਨੇ ਪਾ ਪਾ ਕੇ ਉਹਨੂੰ ਇਹ ਮਰਦ ਰੱਬ ਜੀ ਜੋਦਦੇ ਨੇ ਬਰਮਕ ਪਾਏ ਬਰਮਕ ਪੂਜੇ ਨਹੀਂ پا ਸਕੈ ਸਮਝੇ ਨਹੀਂ ਸਕੈ ਵੀ ਕਿਹੜਾ ਮਰਦ ਹੈ ਜਿਹੜਾ ਸਾਡੀ ਵਰਤਦਾ ਹੈ ਠੀਕ ਹੈ ਜੀ ਉਹ ਪੌਹਲ ਅਮਰਤ ਦਾ ਫੇਰ ਜੋ ਨਾਮ ਦਾ ਭਲੇਖਾ ਪਾਇਆ ਹੋਇਆ ਹੈ ਜੀ ਉਹ ਤਾਂ ਪੌਹਲ ਹੈ ਉਰੂਪਤ ਕਹੀ ਜਾਂਦੀ ਅਮਰਤ ਫੇਰ ਹੁਣ ਦਿਖਣਾ ਪੈਂਦਾ ਜੇ ਇਹਨੂੰ ਅਮਰਤ ਕਹਿੰਦੇ ਸਾਦੀ ਵਰਸਾ ਪੈਂਦਾ ਸੀ ਉਹਨਾਂ ਨੇ ਗਾਇਬੇ ਕਰਤਾ ਨਾਮ ਨਾਲ ਨਾ ਚੱਲ ਸੀ ਜਾਸ ਗਵਾਏ ਗੁਰਮਤੀ ਜਾਗੇ ਤਿਨੀ ਘਰ ਰੱਖਿਆ ਦੂਤਾਂ ਕਾ ਕਿਛੂ ਬੇਨਾ ਦੇ ਨਾਲ ਨਾ ਚੱਲ ਸੀ ਨਾਮ ਦੇ ਬਿਨਾ ਨਾਲ ਕੁਝ ਵੀ ਨਹੀਂ ਜਾਣਾ ਇੱਥੋਂ ਚੱਲ ਸੀ ਜਨਮ ਗਵਾਏ ਜਨਮ ਗਵਾ ਕੇ ਚਲੇ ਜਾਣਗੇ ਜਿਹਨਾਂ ਸੰਤਰੇ ਦੇ ਕੱਪੜੇ ਵਾਲੇ 108 108 ਸ੍ਰੀ ਫਿਰ ਦਰਨਪ ਤੇ ਪਾਉਜੇ ਤੇਰਾ ਕੀ ਹਾਲੂ ਗੁਰਮੱਤ ਦੁਆਰਾ ਜਿਹੜੇ ਜਾਗਿਆ ਇਹ ਉਹਨਾਂ ਦਾ ਕਰ ਗਿਆ ਬਚ ਉਹਨੇ ਆਪਣਾ ਘਰ ਲਿਆ ਬਚਾ ਦੂਤਾਂ ਤੋਂ ਉਹ ਦੂਤਾਂਾਂ ਦੇ ਨਾਲ ਤਾਂ ਹੁਣ ਆਏ ਸੀ ਜਿਹੜੇ ਜਾਗਦੇ ਸੀ ਉਹਨਾਂ ਦਾ ਕਰ ਲਈਟ ਆਇਆ ਬਾਕੀ ਜਿਹੜੇ ਸੁੱਤੇ ਤੇ ਉਹਨਾਂ ਦਾ ਘਾਟਾ ਗੁਰਮਤਨਾਂ ਜਾ ਗਏ ਉਹਨਾਂ ਦਾ ਘਰ ਬਚ ਗਿਆ ਉਹਨਾਂ ਦਾ ਮਹਿਲ ਬਚ ਗਿਆ ਬਾਕੀਆਂ ਦੇ ਘਟ ਹੈ ਜੀ ਠੀਕ ਹੈ ਜੀ ਇੱਥੇ 8ਵੀਂ ਪੌੜੀ ਸਮਾਪਤੀ ਹੈ ਜੀ